श्लोक मोहल्ला पहला नानक तुलियां तोल जे जियो पीछे पाईए इकस ना पूजें बोल जे पूरे पूरा कर मिले देखो ना तोल नानक कह रहे जे तौलण होवे बोलदा झूठ है सच है छड्डी बोल वो बट्टा आत्मा पा पीछे आत्मा देख बोल ठीक है ਆਤਮਾ ਨੂੰ ਦੀਓ ਗੱਲ ਕਰ ਰਿਹਾ ਜੋ ਬੋਲ ਰਿਹਾ ਇਹ ਕਿਸੇ ਹੋਰ ਦੀ ਹੈ ਤੇ ਕਿ ਆਤਮਾ ਦਾ ਵੱਟਾ ਚੜਾ ਦੇਣਾ ਗੱਲ ਆਤਮਾ ਦੀ ਹੈ ਤਾਂ ਬੋਲ ਸਹੀ ਹੈ ਜੇ ਆਤਮਾ ਦੀ ਗੱਲ ਨਹੀਂ ਹੈ ਤਾਂ ਬੋਲ ਸਹੀ ਨਹੀਂ ਉਹ ਬੋਲ ਹਲਕਾ ਹੋ ਜਾਣਾ ਆਤਮਾ ਵਾਲਾ ਫਸਾ ਉੱਠਣਾ ਹੀ ਦੀ ਜ਼ਮੀਰ ਤੋਂ ਭਾਉ ਮੁਝ ਭਾਰਾ ਵੱਡਾ ਤੋਲ ਜਿਹੜਾ ਭਾਉ ਦੇ ਵਿੱਚ ਹੈ ਉਹ ਮੁਝਾ ਹੈ ਵੱਡਾ ਭਾਰਾ ਉਹਦਾ ਤੋਲ ਵੀ ਵੱਡਾ ਹੈ ਗਵਨਦਾਰ ਹੈ ਗੱਲ ਉਹ ਸੱਚੀ ਗੱਲ ਦੁਰਮਤ ਹੌੜੀ ਬੋਲੇ ਬੋਲ ਦੁਰਮਤੀ ਦੇ ਬਿਲ ਬੋਲ ਹੁੰਦੇ ਨੇ ਹੌਲੇ ਹੁੰਦੇ ਨੇ ਜੇ ਪਿੱਛੇ ਬੱਟਾ ਪਾ ਲਈਏ ਨਾ ਆਤਮਾ ਦਾ ਉਹ ਪੂਰਾ ਕਰਮਿਲ ਹੈ ਇੱਕ ਵੀ ਬੋਲ ਨਹੀਂ ਬਰਾਬਰ ਜਾਂਦਾ ਜੇ ਪੂਰੇ ਪੂਰਾ ਕਰਮਿਲ ਹੈ ਪਰ ਗਾਂ ਸੁਣ ਵਾਲਾ ਪੜਨ ਵਾਲਾ ਜੇ ਪੂਰਾ ਹੋਵੇ ਨਾ ਦੋਏ ਪੂਰੇ ਹੋਣ ਜੇ ਦੋਏ ਪੂਰੇ ਹੋਣ ਵਿਚਾਰ ਵਾਲਨ ਇਹ ਤਾਂ ਕਹਿਣਗੇ ਵੀ ਇੱਕ ਵੀ ਬੋਲ ਪੂਰਾ ਨਹੀਂ ਪਰ ਜੇ ਇੱਕ ਪਾਸੇ ਬੰਦਮੁਖ ਹੋਵੇ ਕੋਈ ਨਹੀਂ ਇਹ ਵੀ ਠੀਕ ਹੈ ਪੂਰੇ ਪੂਰਾ ਕਰ ਮਿਲਿਆ ਪੂਰੇ ਨੂੰ ਪੂਰਾ ਮਿਲੇ ਜੇ ਉਹ ਫੈਸਲਾ ਕਰ ਵੀ ਹਾਂ ਠੀਕ ਹੈ ਬਈ ਇਹ ਖੜਾ ਕੋਕ ਗੁਰਮੁਖੀ ਕੋਟੇ ਘਰੇ ਪਛਾਣਨ ਤੋਂ ਗੁਰਮੁਖ ਘੱਟੇ ਹੋ ਜਾਣਗੇ ਉਹ ਫੈਸਲਾ ਕਰ ਹਾਂ ਬਈ ਇਹ ਹੋੜੀ ਹੈ ਚੀਜ਼ ਇਹ ਗੱਲ ਕੱਚੀ ਬਾਣੀ ਹੈ ਉਹ ਪੱਕੀ ਬਾਣੀ ਹੈ ਕੱਚੀ ਪੱਕੀ ਬਾਣੀ ਦੀ ਗੱਲ ਹੈ ਕਬਾਂ ਵੀ ਜਿੱਥੇ ਹੋ ਕੇ ਜਿ ਵਿਚਾਰਿਆ ਜਾਵੇ ਤਾਂ ਆਪੇ ਪਤਾ ਅੰਦਰੋਂ ਲੱਗ ਜਾਂਦਾ ਹੈ ਵੀ ਇਹੋ ਗੱਲ ਹੈ ਜੀ ਨਾ ਕਰ ਸਕਦਾ ਆਪਾਂ ਨਹੀਂ ਨਹੀਂ ਇੱਕ ਬੋਲ ਉਹ ਜਿਹੜੇ ਪਿੱਛੇ ਕਹੀ ਹੋਈ ਗੱਲ ਹੈ ਨਾ ਉਹਦੇ ਬਰਾਬਰ ਇੱਕ ਵੀ ਬੋਲ ਨਹੀਂ ਪੁੱਛਦਾ ਹੈ ਦੇ ਬਰਾਬਰ ਇੱਕ ਵੀ ਬੋਲ ਨਹੀਂ ਪੁੱਛਦਾ ਭਾਈ ਗੁਰਦਾਸ ਦੀ 12 ਚੋਂ ਕੱਚੀ ਵਾਲੀ ਦਾ ਪੱਕੀ ਬਾਣੀ ਦੇ ਬਰਾਬਰ ਇੱਕ ਮੋਹਰ ਬਲੀ ਬੋਲਣ ਦੀ ਗੱਲ ਹੈ ਨਾ ਵਾਹ ਪਾਲਾ ਚੱਕੇ ਨੀ ਹੋਣਾ ਪੂਰਾ ਵਜਨ ਉਹਦੇ ਪਹਿਲੇ ਹੀ ਦੀ ਸੱਜਣਾ ਉਠੋ ਠੀਕ ਹੈ ਜੀ ਹਾਂ ਜੀ ਵੱਡਾ ਹੌਲੀ ਬੋਲ ਆਹ ਵੱਡਾ ਆਖੜ ਭਾਰਾ ਤੋਲ ਜਿਹੜਾ ਵੱਡਾ ਆਖੜਾ ਨਾ ਆਖਣ ਵੱਡਾ ਜਿਹੜਾ ਵੱਡੇ ਰਾਜਾ ਦਾ ਵਡਿਆਈ ਹੈ ਵੱਡੇ ਦੀ ਵਡਿਆਈ ਵੱਡੇ ਕੀ ਵਡਿਆਈ ਹੈ ਵੱਡੇ ਬਾਰੇ ਜੋ ਆਖਿਆ ਗਿਆ ਹੈ ਵੱਡੇ ਦੀ ਜੇ ਵਡਿਆਈ ਕੀਤੀ ਗਈ ਹੈ ਉਹੀ ਟੋਲ ਵਜ਼ਨਦਾਰ ਛੋਟੇ ਨੂੰ ਵੱਡਾ ਕਰਕੇ ਅਸੀਂ ਕਹਿ ਦਤਾ ਹੋਰ ਹੌਲੀ ਬੱਤੀ ਹੋ ਮਤਾਂ ਹੌਲੀਆਂ ਸਰੀਰ ਧਾਰਿਆ ਦੇ ਧਾਰੀ ਦੀ ਵਡਿਆਈ ਕਰਤੀ ਦੇ ਧਾਰੀ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਹੋਰ ਹੌਲੀ ਬੱਤੀ ਹੌਲੇ ਬੋਲ ਉਹ ਬੋਲ ਹਲਕੇ ਦੇ ਕੁਰਬਾਨੀ ਦੇ ਬਰਾਬਰ ਨਹੀਂ ਕੱਤੀ ਬਾਣੀ ਆਹ ਪੱਕੀ ਬਾਣੀ ਨਹੀਂ ਹੈ ਕੋਸ ਆਸ ਨੇ ਬਾਤ ਬੋਲਣ ਦੀ ਵਡਿਆਈ ਕਰ ਰੱਖੀ ਬੋਲਣ ਦੀ ਵਡਿਆਈ ਤੋਂ ਸ਼ੁਰੂ ਕਰਤੀ ਗੱਲ ਹਾਂਜੀ ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡਾ ਤੋਲੇ ਸੁਨਿਆਰ ਉਹ ਦੁਨੀਆ ਦੇ ਦਾ ਧਰਤੀ ਪਾਣੀ ਪਰਬਤ ਇਹ ਵਜ਼ਨ ਦੁਨੀਆ ਤੌਰ ਤੇ ਤਾਂ ਇਹ ਨਹੀਂ ਕਿ ਜਾ ਸਕਦਾ ਚਪਟ ਨੇ ਤੋਲੇ ਸੁਨਿਆਰ ਸੁਨਿਆਰ ਦੇ ਕੰਡੇ ਤੇ ਕਿਵੇਂ ਤਲ ਜਾਣਗੇ ਜਿਵੇਂ ਧਰਤੀ ਐ ਏਡੀ ਵੱਡੀ ਪਾਣੀ ਇੰਨੇ ਜਿਆਦਾ ਪਰਬਤ ਨੇ ਐਡੇ ਵੱਡੇ ਵੱਡੇ ਕੰਡਿਆ ਸੁਨਿਆਰੇ ਦਾ ਕਰਨਾ ਬਿਲਕੁਲ ਛੋਟਾ ਹੁੰਦਾ ਹੈ ਰੱਸੀਆਂ ਆਇਆ ਤਾਰਾਂ ਦਾ ਇਹ ਜੋ ਇਹਦੀ ਬਜ਼ੂਤ ਨਹੀਂ ਹੁੰਦੀਆਂ ਨਹੀਂ ਤੋਲਿਆ ਜਾ ਸਕਦਾ ਇਸ ਕਰਕੇ ਸੱਚੀ ਵੀ ਬੁਧੀ ਬੁੱਖੀ ਹੁੰਦੀ ਤੇ ਨਹੀਂ ਤੋਲਿਆ ਜਾ ਸਕਦਾ ਸੱਚ ਨਹੀਂ ਪਰਖ ਦੁਨੀਆਵੀ ਬੁਧੀ ਨਹੀਂ ਕਰ ਸਕਦੀ ਸੋਹਾਰੇ ਦਾ ਕੰਡਣਾ ਇਹਦੀ ਬੁਧੀ ਦੁਨੀਆ ਦੀ ਬੁਧੀ ਸੋਹਾਰੇ ਦਾ ਕੰਡਣਾ ਹੈ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਆਵਾਜ਼ ਨੂੰ ਗੁਰਪੰਨੀ ਦੇ ਕੁਝ ਜੀ ਕਹਿਤੀ ਉਹ ਸੋਹਾਰੇ ਦਾ ਕੰਡਣਾ ਸੀ ਉਹਨਾਂ ਕੋਲ ਇਹਤ ਬੜਿਆ ਦਾ ਬੜਿਆ ਜੀ ਸੋਹਾਰੇ ਦੇ ਸੀ ਉਹਨਾਂ ਕੋਲ ਹੋਰ ਕੁਛ ਨਹੀਂ ਸੀ ਤੋਲਾ ਮਾਸਾ ਰੱਤਕ ਪਾਏ ਨਾਨਕ ਪੁੱਛਿਆ ਦੇਹ ਪੁਜਾਏ ਆ ਤੋਲਾ ਮਾਸਾ ਜਿਹੜਾ ਰੱਤੀ ਇਹ ਇਹ ਜੀਆਂ ਚੀਚਾਂ ਨੇ ਛੋਟੀਆਂ ਛੋਟੀਆਂ ਮੋਡੀਆਂ ਗੱਲਾਂ ਤੋਂ ਕਰ ਲੈਂਦੇ ਨੇ ਧਿਆਨ ਦਿਓ ਜੇ ਉਹਨਾਂ ਨੇ ਕੋਈ ਪੁੱਛ ਲਈਏ ਕਾਂ ਸਵਾਲ ਕਰ ਲਈਏ ਚਾਲਾ ਲਾ ਜਾਂਦੇ ਨੇ ਫੇਰ ਗੱਲ ਟਾਲ ਜਾਂਦੇ ਨੇ ਪੁੱਛਿਆ ਦੇਈ ਪੁਜਾਏ ਪਰ ਤੁਸੀਂ ਆਪੇ ਪੜ੍ਹੋਗੇ ਤੁਸੀਂ ਮਾਰਾ ਫੇਰ ਹੀ ਜਾਓ ਕਿਵੇਂ ਵੀ ਕਿਵੇਂ ਹੋ ਭਾਈ ਮਾਲਾ ਨਾਲ ਕਿਵੇਂ ਬਸ ਤੁਸੀਂ ਫਿਰੋ ਤਾਂ ਸਹੀ ਸਮਾਧੀ ਲਾਓ ਤਾਂ ਸਹੀ ਆਪੇ ਬੋਲਜੋਗੇ ਆ ਜਵਾਬ ਹੈ ਕਿਤੇ ਧੁਰ ਪਛਾਦੰਦੇ ਨੇ ਉਹ ਮੂਰਖ ਅੰਧਿਆਂ ਕਹਿ ਕਹਿ ਕਹਿਣ ਕਹਾਇਣ ਆਪ ਮੂਰਖ ਨੇ ਜਿਹੜੇ ਅੰਦੇ ਲੋਕ ਨੇ ਵਿਚਾਰੇ ਅੰਧੀ ਤਾਤ ਉਹਨਾਂ ਦੀ ਕੀ ਹੈ ਫਿਰਲੇ ਪੰਡਿਤ ਕਹੇ ਪਾਛੇ ਪੜੀ ਵੀ ਇਹ ਜਗਤਾਂ ਜਿਹੜਾ ਹੈਗਾ ਸਾਰਾ ਲਕੀਰ ਦਾ ਫਕੀਰ ਹੈ ਅੰਧੀ ਤਾਤ ਦੌੜ ਤਾਂ ਨਾਲੋਂ ਦੌੜ ਹੈ ਵੀ ਦੌੜ ਹੈ ਜੰਗ ਦੀ ਗੁਰ ਕੰਦੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਦੇ ਪ੍ਰਚਾਰ ਕਰਿਆ ਮੱਤਾ ਦੇ ਭਾਲ ਕੋ ਉਹਨਾਂ ਨੇ ਅਮੀਂ ਦੌੜ ਲਾਤੀ ਸਾਰੇ ਮੁਲਕ ਦੀ ਵੱਖਰੇ ਵੱਖਰਿਆਂ ਦੀ ਵਾਇਆ ਦੇ ਵਿੱਚ ਅੱਖ ਕਿਸੇ ਦੀ ਵੀ ਨਹੀਂ ਖੁੱਲੀ ਹੋਈ ਜਾਗਿਆ ਕੋਈ ਵੀ ਨਹੀਂ ਸੁਪਨੇ ਦੀ ਉੱਲਾ ਨੇ ਸਭ ਕਾਇ ਕਹਿਣਾ ਕਾਣ ਆਪ ਉਹ ਜਣੀਆਂ ਗੱਲਾਂ ਕਹਿਤ ਪਿਛਲੀਆਂ ਪ੍ਰਚਾਰੀਆਂ ਹੋਈਆਂ ਨੇ ਉਹੀ ਕਹੀ ਜਾਂਦੇ ਨੇ ਪੁਰਾਣੀਆਂ ਹੀ ਸਾਖੀਆਂ ਸੁਣਾਈ ਜਾਂਦੇ ਹਨ ਹਾਂਜੀ ਮਹੱਲਾ ਪਹਿਲਾ ਆਖਣ ਔਖਾ ਸੁਣਤ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖੇ ਸ਼ਬਦ ਭਾਖੇ ਅਰਦ ਉਰਦ ਦਿਨ ਰਾਤ ਸਾਚ ਆਖਣਾ ਬਹੁਤ ਔਖਾ ਆਖਣ ਔਖਾ ਦੂਜੇ ਦੀ ਤਸੱਲੀ ਕਰਾਉਣੀ ਬਹੁਤ ਔਖੀ ਹੈ ਧਰਮ ਦੇ ਲੋਤੇ ਤਸੱਲੀ ਉਸ ਦੀ ਤਸੱਲੀ ਕਰਾਉਣੀ ਜਿਹਨੂੰ ਕਹਿੰਦੇ ਆ ਖੁਦਾ ਇੱਕ ਹੈ ਚੌਦਾ ਦੀ ਮਰਦਾ ਦੀ ਉਹਦਾ ਕੋਈ ਜੜ ਤੇ ਇਸ ਗੂੜ ਤੇ ਸਾਰੇ ਧਰਮ ਖੜੇ ਨੇ ਪਰ ਉਹਦੇ ਬਾਰੇ ਕੁਝ ਗਿਆਨ ਕਰਾਉਣਾ ਬਹੁਤ ਔਖਾ ਹੈ ਗਿਆਨ ਦੇ ਵਿੱਚ ਉਹਦਾ ਦਰਸ਼ਨ ਕਰਾਉਣਾ ਬਹੁਤ ਔਖਾ ਹੈ ਉਹਦੇ ਬਾਰੇ ਕਤੁਨੇ ਕੱਲ ਨਾਲ ਬਹੁਤ ਔਖਾ ਆਖਣ ਔਖਾ ਸੁਣਨਾ ਔਖਾ ਆਖਣ ਦਾ ਔਖਾ ਲੋਕਾਂ ਨੂੰ ਤਾਂ ਸੁਣ ਤਾਂ ਵਾਲਿਆਂ ਦੇ ਵਿਛੂ ਲੜ ਜਾਂਦਾ ਕਿਉਂਕਿ ਦੂਏ ਪਾਸੇ ਨੂੰ ਜੋ ਲਿਜਾ ਰਹੇ ਨੇ ਉਹ ਅੱਦੀ ਦਾ ਹੈ ਲੋ ਅੱਦੀ ਦਾ ਵਾਲੇ ਜੇ ਉਹਨਾਂ ਨੂੰ ਔਖਾ ਉਹ ਕਹਿੰਦੇ ਆਜੋ ਆਜੋ ਇਹਦੀ ਗੱਲ ਸੁਣੋ ਆ ਜਾਪੀ ਆਖ ਜਿਹੜੇ ਆਖ ਰਹੇ ਨੇ ਅਕਲ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੇ ajo ਬਿਆਨ ਕੀਤਾ ਨਹੀਂ ਜਾ ਸਕਦਾ। ਜਾਣ ਕਰਨ ਵਾਲਿਆਂ ਦੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਿਆਨ ਤੇ ਪਰੇ ਹੈ ਗੱਲ। ਅਸਲ ਗੱਲ ਬਿਆਨ ਤੇ ਵੀ ਪਰੇ ਹੈ। ਬੋਲ ਅਬੋਲ ਹੈ ਸੋਏ ਬੋਲ ਦਿੱਤਾ ਕੁਝ ਬੋਲਿਆ ਨਹੀਂ ਜਾ ਸਕਦਾ। ਜਿਹੜਾ ਨਹੀਂ ਬੋਲਿਆ ਜਾ ਸਕਦਾ ਉੱਥੋਂ ਪੁੱਜਣ ਵਾਲੀ ਗੱਲ ਸ਼ੁਰੂ ਹੋ ਜਾਂਦੀ। ਅਸਲ ਗੱਲ ਫੇਰ ਵੀ ਨਹੀਂ ਆਖੀ ਜਾ ਰਹੀ। ਬਹੁਤ ਕੁਝ ਆਖਿਆ ਅਸਲੀ ਗੱਲ ਫੇਰ ਵੀ ਰਹਿ ਗਈ ਨਹੀਂ ਆਖੀ ਗਈ ਆਖਰ ਨਾ ਜਾਪੀ ਆਖਰ ਵਾਲੀ ਗੱਲ ਨਾ ਜਾਪੀ ਆਖ ਆਖ ਰਹੀ ਗਈ ਆਖੀ ਨਹੀਂ ਗਈ ਕੁਝ ਆਖਿਆ ਗਿਆ ਫੇਰ ਵੀ ਆਖਰ ਵਾਲੀ ਗੱਲ ਨਹੀਂ ਆਖੀ ਗਈ ਰਹੇਗੀ ਉਹ ਹਾਂਜੀ ਇੱਕ ਆਖ ਆਖਾਂ ਸ਼ਬਦ ਭਾਖਾਂ ਅਰਧ ਉਰਧ ਦਿਨ ਰਾਤ ਇੱਕ ਆਖ ਨੇ ਆਖਾਂ ਸ਼ਬਦ ਭਾਖਾਂ ਸ਼ਬਦ ਵੀ ਕਹਿੰਦੇ ਵੀ ਨੇ ਆ ਸ਼ਬਦ ਉਪਦੇਸ਼ ਵੀ ਦੇ ਰਹੇ ਨੇ ਜਦ ਗੁਰਬੁਧਲੇ ਅਰਦ ਉਰਦ ਦਿਨ ਰਾਤ ਇੱਕ ਵਾਰੀ ਚਿੱਤੋ ਆ ਕੇ ਗੱਲ ਕਰ ਰਹੇ ਨੇ ਗੱਲ ਉਹ ਭਾਵੇਂ ਫੇਰ ਵੀ ਪੂਰੀ ਗੱਲ ਸਹੀ ਉਹਨਾਂ ਤੇ ਆਠਾਖੜ ਤੋਂ ਪਰੇ ਹੀ ਰਹਿ ਬਹੁਤ ਗੁਰਬਾਣੀ ਲਿਖੀ ਗਈ ਪਰ ਅਸਲ ਗੱਲ ਫੇਰ ਵੀ ਉੱਥੇ ਖੜੀ ਹੈ ਬੁੱਝਣ ਵਾਲੀ ਗੱਲ ਬੁਝਾਰਤ ਫੇਰ ਉੱਥੇ ਖੜੀ ਹੈ ਬੁਝਾਰਤ ਜਿਉਂਦੀ ਤਿਉਂ ਖੜੀ ਹੈ ਠੀਕ ਉਰਦ ਨਾ ਕੀ ਭਾਵੇਂ ਜੀ ਅਰਦ ਉਰਦ ਭਾਣਾ ਚਿਤ ਅਰਦੇ ਉਰਦ ਸੁਬੋਚਾ ਠੀਕ ਹੈ ਉਹ ਚਿੱਤ ਵੱਲੋਂ ਦੱਸ ਰਹੀ ਨੇ ਮੈਂ ਕਹਿਣਾ ਬੋਲੂ ਠੀਕ ਹੈ ਜੀ ਮਨ ਮਾਇਆ ਤੋਂ ਜੇ ਪੁੱਠਾ ਨਾ ਜੇ ਕਿਹੋ ਹੋਏ ਤਾਂ ਰੂਪ ਨ ਜਾਤ ਸਭ ਕਾਰਣ ਕਰਤਾ ਕਰੇ ਘਟ ਔਕਟ ਘਟ ਥਾਪ ਪ੍ਰੋਬਲਮ ਕੀ ਹੈ ਉਹ ਨੂੰ ਮਾਰੀ ਦਿਲ ਦਾ ਦਾਖ ਰਹੇ ਨੇ ਕਬੂਲੀ ਤੇ ਚੇਤ ਹੋ ਕੇ ਜੇ ਕਹਿੰਦੇ ਕੁਝ ਹੋਵੇਗਾ ਤਾਂ ਤਾਂ ਜਿ세 ਜੇਕਰ ਹੋਏ ਤਾਂ ਕੋ ਦਿ세 ਤਾਂ ਕੋ ਦਿ세 ਉਹ ਵਾਇਆ ਵਾਲੀ ਦਾ ਕੋਈ ਚੀਜ਼ ਨਹੀਂ ਦਿ세 ਕੀ ਜੇ ਦਿ세 ਤਾਂ ਦਿਖਾ ਦਈਏ ਤੁਹਾਨੂੰ ਦੱਸ ਵੀ ਦਈਏ ਜਾਪੇ ਰੂਪ ਨਾ ਜਾਤ ਨਾਲ ਰੂਪ ਜਾਪਦਾ ਨਾਲ ਦੀ ਜਾਤੀ ਆਪਦੀ ਹੈ ਉਹ ਦੀ ਕਹੀ ਜਾਂਦੇ ਆ ਅਸੀਂ ਪੁੱਝ ਲਿਆ ਆਪਣੀ ਪੁਝਾ ਹਰ ਦੱਸ ਲਾਇਆ ਜੇ ਕਿ ਹੋਵੇ ਜੇ ਕੁਝ ਹੋਵੇਗਾ ਸਾਹਮਣੇ ਠੋਸ ਉਹ ਠੋਸ ਕੋ ਦੇਖੇ ਖਾਂ ਜਾ ਪਰੂਕ ਨਾ ਜਾਦ ਰੂਪਰ ਜਾਦੂ ਦੀ ਜਾਪਣ ਵਾਲੀ ਖਾਦੂ ਦੇ ਵਾਲੀ ਜੀ ਤਾਹਣੀ ਪਰ ਫਿਰ ਵੀ ਰੂਪ ਉਹਦਾ ਹੈ ਰੰਗ ਵੀ ਹੈ ਹਰ ਆਪਣੇ ਇੱਕ ਰੰਗ ਹੈ ਆਪਣੇ ਉਹ ਰੰਗੀ ਤੇਰਾ ਰੂਪ ਅਨੂਪ ਹੈ ਰੂਬੀ ਹੈ ਠੀਕ ਹੈ ਜੀ ਹਾਂ ਜੀ ਸਭ ਉਥਾਪ ਦਿੰਦਾ ਹੈ ਉਥਾਪ ਦਿੰਦਾ ਕਿਸੇ ਨੂੰ ਜੋੜ ਦਿੰਦਾ ਹੈ ਘੜ ਦੇ ਵਿੱਚ ਕਿਸੇ ਨੂੰ ਘੜ ਦੋ ਤੋੜ ਦਿੰਦਾ ਹਾਂ ਕੱਟ ਗਈ ਹੁੰਦਾ ਜੀ ਉਹ ਕੱਟ ਤੋੜ ਦੇਣਾ ਘੜ ਤੋਂ ਆਖਣ ਔਖਾ ਨਾਨਕਾ ਆਖ ਨਾ ਆਖ ਆਖਣ ਔਖਾ ਨਾਨਕਾ ਨਾਨਕਾ ਆਖਣਾ ਮੋਤੋ ਆਖ ਆਖ ਜਾਪੇ ਆਖ ਆਖਣ ਵਾਲੀ ਚੀਜ਼ ਆਖੀ ਹੋ ਨਹੀਂ ਜਾ ਰਹੀ ਅਗਲ ਆਖਣ ਵਾਲੀ ਚੀਜ਼ ਆਖੀ ਦੀ ਜਾ ਰਹੀ ਇੱਥੇ आके ਕੇ ਉਹ ਜਿਹੜੀ ਕੱਲ ਗੱਲ ਸੀ ਇੱਥੇ ਫਸ ਗਈ ਆਪਣੀ ਆ ਕੇ ਹਾਂਜੀ ਪੌੜੀ ਨਾਏ ਸੁਣਿਆ ਮਨ ਰਹਿਸੀ ਹੈ ਨਾਮੇ ਸ਼ਾਂਤ ਆਈ ਨਾਏ ਸੁਣੀਏ ਮਨ ਤ੍ਰਿਪਤੀ ਹੈ ਸਭ ਦੁੱਖ ਗਵਾਈ मन ਸੁਣੀਏ ਬੁੱਲ ਜਾਏ ਕਿ ਬੋਲ ਕੇ ਤੇਖ ਜਾਂਦਾ ਬੋਲਦਾ ਰਸ ਜਿਹੜਾ है ਨਾ ਰਸ ਸਮਝ ਜਦੋਂ ਟਿਕਦਾ ਜਾਂਦਾ ਤਾਂ ਬੁੱਧੀ ਸੁਖ ਆ ਜਾਂਦੀ ਹੈ ਕਿ ਗੁੱਦੀ ਸਮਝ ਆਉਂਦੀ ਆਪਾਂ ਨੂੰ ਵੀ ਬੋਲ ਕੀ ਹੈ ਜਿਹੜਾ ਕਿ ਟਿਕਦਾ ਜਾਂਦਾ ਚੱਲੀ ਇਹਦੀ ਆਉਂਦੀ ਆਪਾਂ ਸ਼ਾਂਤੀ ਆਈ ਨਾ ਟਿਕਦਾ ਨਹੀਂ ਸ਼ਾਂਤੀ ਆ ਗਈ ਜਦ ਗਿਆ ਟਿਕਿਆ ਤਾਂ ਸ਼ਾਂਤੀ ਆ ਗਈ ਹਾਂ ਨਾ ਮਨ ਤ੍ਰਿਪਤੀ ਹੈ ਸਭ ਦੁੱਖ ਗਵਾਈ ਬਸ ਤ੍ਰਿਪਤੀ ਆ ਮੈਂ ਜਦ ਇਹਦਾ ਬੰਦਰਾ ਨਾਮ ਸੁਣ ਗਿਆ ਤੁਹਾਨੂੰ ਸਮਝ ਆ ਗਈ ਤੁਹਾਨੂੰ ਸਭ ਦੁੱਖ ਗਵਾਈ ਸਾਰਾ ਦੁੱਖ ਦੂਰ ਹੋ ਗਿਆ ਜੇ ਫਿਰ ਵੀ ਸੁਣ ਲੋ ਨਾਮ ਤੁਸੀ ਸੁਣ ਲਿਆ ਲੱਛਣ ਹੈ ਲੱਛਣਾਂ ਤੋਂ ਪਤਾ ਜੇ ਲੱਛਣ ਨਹੀਂ ਪੂਰੇ ਕਰਦਾ ਤਾਂ ਨਾਮ ਨਹੀਂ ਸੁਣਿਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਅੱਖ ਨਹੀਂ ਬਣਿਆ ਨਾਮ ਨਹੀਂ ਸੁਣਿਆ ਨਾ ਨਾਮ ਜਪਿਆ ਨਾ ਸੁਣਦੇ ਹਾਂਜੀ ਨਾਏ ਸੁਣੀਏ ਨਾ ਉਪਜੈ ਨਾਮੇ ਵਡਿਆਈ ਨਾਮਹਿ ਸਭ ਜਾਤ ਪਤ ਨਾਮੇ ਗਤ ਪਾਈ ਆ ਸੁਣੀਏ ਜਿਨ੍ਹਾਂ ਨਾਮ ਸੁਣ ਲਿਆ ਨਾਉ ਉਪਜਾਉ ਨਾਲ ਅੰਦਰੋਂ ਨਾਮ ਪੈਦਾ ਹੋ ਜਾਂਦਾ ਦਸੋ ਕਿਹਦੇ ਅੰਦਰੋਂ ਪੈਦਾ ਹੋਇਆ ਇਹ ਗਿਆਨ ਸੁਣ ਕੇ ਅੰਦਰੋਂ ਗਿਆਨ ਹੈ ਨਾ ਸੁਣਿਆ ਨਾ ਉਪਜਾ ਜਿਹੜੇ ਪਹਿਲੇ ਨਾਮ ਦੇ ਉਹਨਾਂ ਦੇ ਅੰਦਰੋਂ ਨੂ ਪੈਦਾ ਹੋਇਆ ਹੈ ਇਹ ਸ਼ਰਤ ਪੂਰੀ ਕੀਤੀ ਹੈ ਲਿਖੀ ਹੋਈ ਹੈ ਗੁਰਬਾਣੀ ਰੋਜ਼ ਪਾਠ ਕਰਦੇ ਹੋ ਇਹ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਕਰੀ ਜਾਂਦੇ ਨੇ ਕੱਲੀ ਤੇ ਕਰਦੇ ਜੋਰ ਵਾਲਾ ਕਰਦੇ ਸੀ ਉਹ ਵਿਰੋਧ ਕਰ ਰਹੇ ਨੇ ਅਸਲ ਦੇ ਵਿੱਚ ਦੇ ਉਹ ਕਹਿੰਦੇ ਨੇ ਕੱਲੀ ਜਾਓ ਦੱਬੀ ਚਲੋ ਇਹ ਲੋਕਾਂ ਨੂੰ ਜਿਹੜਾ ਅੰਦਰੋਂ ਪੈਦਾ ਹੋ ਉਹ ਵੜਿਆਈ ਖੁਦ ਕਰੂਗਾ ਆ ਕੀਤੀ ਹੈ ਤਾਂ ਤਾਂ ਦੇ ਪੱਟਾਂ ਦੇ ਹੋਣਾ ਦੇ ਤੁਹਾਡੇ ਕੀਤੀ ਹੈ ਹਾਂ ਨਾਮ ਜਾਤ ਪੱਤ ਨਾਮੇ ਗਤੀ ਇੱਜ਼ਤ ਥੋੜੀ ਹੈ ਹੁਕਮ ਨਾਲੇ ਤੁਹਾਡੀ ਬੁੱਧੀ ਅੰਦੇ ਵਧਣੀ ਹੈ ਇਹਨੂੰ ਸਮਝੇ ਬਿਨਾਂ ਨਹੀਂ ਕੁਝ ਵੀ ਹੋਣਾ ਜੇ ਪੈ ਗਿਆ ਨਾ ਬਹਿਸ ਵਿੱਚ ਥੁੰਨ ਤੋਂ ਬਸ ਬਾਦੀ ਬਿਰਥੇ ਖੋਜੀ ਉੱਜਣਾ ਖੋਜ ਕਰਦੇ ਰਹੋ ਪੈਦਾ ਹੋਊਗਾ ਨਾ ਅੰਦਰੋਂ ਕੋਜੀ ਉਪਜਾ ਜਦ ਪਦਾਰਥ ਮਿਲੂਗਾ ਕੋਜੀ ਨੂੰ ਵੱਡੀ ਬਲਸਾ ਜਿੱਤੇ ਬਾੜ ਜਿਹੜੀ ਸਭ ਜਾਤੀ ਪੈਦਾ ਹੋਈ ਹੈ ਜਿੱਦਾਂ ਵੀ ਸ੍ਰਿਸ਼ਟੀ ਵਿੱਚ ਵੀਦ ਹੈ ਨਾਮ ਤੇ ਤੈਰਾ ਹੋਈ ਹੈ ਆ ਜੇ ਤਾਂ ਜਾਤ ਬਾਹਲੀ ਕਰੋਗੇ ਅਰਥ ਤੇ ਤਾਂ ਇਹ ਆਜੂਗਾ ਇਹ ਜਾਤੀ ਦਾ ਅਰਥ ਜਾਣਕਾਰੀ ਕਰੋਗੇ ਜਾਣਕਾਰੀ ਵਿੱਚ ਕਰ ਸਕਦੇ ਆਂ ਇਹਦੀ ਜਾਣਕਾਰੀਆਂ ਅੱਜ ਤੱਕ ਮਿਲੀਆਂ ਰੋਸ ਤੋਂ ਮਿਲੀਆਂ ਤੁਹਾਨੂੰ ਕਿ ਜਿਹੜਾ ਕਾਹੀ ਅਸਲੀ ਪਿਓ ਰੇ ਅੱਜ ਤੱਕ ਜਿਹੜੀਆਂ ਜੁਨਾ ਜੋ ਜਾਣਕਾਰੀਆਂ ਤੁਸੀਂ ਤੁਹਾਨੂੰ ਮਿਲੀਆਂ ਨਾ ਕੋਈ ਮਿਲੀਆਂ ਸਭ ਜਾਤੀ ਪੱਤ ਪੱਤ ਕਾਹੇ ਜਿਤ ਵੱਢੀ ਹੈ ਆਦਮੀ ਦੀ ਜਿਹਾ ਜ਼ਿਆਦਾ ਨਾਮੇ ਨਾਮ ਨਾਲੇ ਹੁਣ ਅੱਗੇ ਗੱਲ ਪਾਉਣੀ ਹਾਂਜੀ ਗੁਰਮੁਖ ਨਾਮ ਧਿਆਈਆਂ ਨਾਨਕ ਲਿਵ ਗੁਰਮੁਖ ਨਾਮ ਦੇ ਵਿੱਚ ਧਿਆਨ ਰੱਖਦੇ ਨੇ ਲਿਵ ਲਾ ਕੇ ਉਹ ਨਾਲੇ ਲਿਵ ਜੁੜੀ ਰਹਿੰਦੀ ਹੈ ਧਿਆਨ ਨਾਮ ਨਾਲ ਜੋੜ ਕੇ ਰੱਖਦੇ। ਨਾਮੇ ਲਿਵ ਲਈ ਨਾਮ ਦਾ ਨਿਬਲਾ ਕੇ ਰੱਖਦਾ। ਠੀਕ ਹੈ ਜੀ। ਜਦੋਂ ਧਿਆਨ ਜੁੜਿਆ ਰਹਿੰਦਾ ਨਾਮ ਨਾਲ ਫਿਰ ਲਿਵ ਲੱਗੀ ਰਹਿੰਦੀ ਹੈ ਧਿਆਨ ਜੋੜਨਾ ਲਿਵ ਲੱਗਣੀ ਗੱਲ ਆ। ਠੀਕ ਹੈ ਜੀ। ਇੱਥੇ 6ਵੀਂ ਪੌੜੀ ਸਮਾਪਤੀ ਹੈ ਜੀ। ਹਾਂ